ਦੁ ਮਹਲਾ ਮਹੱਲਾ ਤੀਜਾ ਕਲਯੁਗ ਮਹਿ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ ਸਤਗੁਰ ਸੇਵ ਔਰ ਨਾਮ ਮਨ ਵਸਾਇਆ ਹਰ ਦਿਨ ਨਾਮ ਧਿਆਇਆ ਕਲਯੁਗ ਆ ਨਾਮ ਸਤਾਣ ਭਗਤੀ ਖੱਟਿਆ ਭਗਤ ਬਹੁਤ ਅੱਛਾ ਜੀ ਭਗਤੀ ਨਹੀਂ ਭਗਤੀ अच्छा ये भक्ति होता सियारी नाल होता है। ये भक्तान ने रापर बहुत बजन है भगत दा ठीक है जी। पंजाबी विच बच्चे भक्ति पढ़ांगे अपन ये भगत दा बहुत वचन है ठीक है जी। भक्ति सियारी नाल होता है। भक्ति जब भक्ति गई है तो सियारी नाल होता है। बहुत दा ਆਰਕਤੰਪਾ ਇਤੋਂ ਉੱਚਾ ਕੋਈ ਪਦਈ ਨਹੀਂ ਹੈ ਭਵਤਾ ਨੇ ਜਿਹੜਾ ਨਿਦਾਨ ਨਿਦਾਨ ਬੜਾ ਕੋਈ ਪਦਵੀ ਨਹੀਂ ਦੀ ਉੱਚતમ ਪਦਵੀ ਪਾ ਲਈ ਇਹ ਖੱਟ ਕੇ ਸਤਪੁਰ ਸੇਵਾਲ ਨਾਮ ਬੰਨ ਬਸਾਇਆ ਸਤਪੁਰ ਦਾ ਪਾਣੀ ਚੱਲ ਕੇ ਸਤਗੁਰ ਦੀ ਤੇ ਬਚਨ ਮੰਨ ਕੇ ਹਾਂਜੀ ਅਨੁਸਾਰ ਚੱਲ ਕੇ ਨਾਮ ਨੂੰ ਵਰਤ ਬਸਾਇਆ ਆਨੰਦ ਨਾਲ ਹੋ ਕੇ ਆਇਆ ਲਗਾਤਾਰ ਨਾਮ ਦੇ ਵਿੱਚ ਧਿਆਨ ਜੁੜਿਆ ਰਹਿੰਦਾ ਸ਼ਬਦ ਵਿਚਾਰ ਤੇ ਲੱਗੇ ਰਹਿੰਦੇ ਐ ਐ ਨਹੀਂ ਲੱਗਦਾ ਕਿ ਪਹਿਲਾ ਜਿਹੜਾ ਹੈਗਾ ਮਨ ਵਸਾਇਆ ਇਹ ਤਾਂ ਹੈਗਾ ਗਿਆਨ ਪਦਾਰਥ ਤੇ ਦੂਸਰਾ ਆਨੰਦ ਨਾਮ ਤੇ ਨਾਮ ਪਦਾਰਥ ਨਹੀਂ ਹੋਏਗਾ ਫਿਰ ਹਾਂ ਪਦਾਰਥ ਦੀ ਗੱਲ ਹੈ ਹਾਂਜੀ ਆਰਾਧਨਾ ਕੀਤੀ ਇਹਨੂੰ ਆਰਾਧਨਾ ਕਹਿੰਦੇ ਆ ਠੀਕ ਹੈ ਜਿਸੇ ਚੀਜ਼ ਤੇ ਧਿਆਨ ਲੈਣਾ ਸਾਡਾ ਇਹ ਬਲੂਗਾ ਬਲੂਗਾ ਕੋਈ ਪੱਕਾ ਹੈ ਠੀਕ ਹੈ ਰੱਖਿਆ ਵਗ ਰਿਹਾ ਹੈ ਦੀ ਦੱਸ ਦੇ ਤੂੰ ਤੇ ਦੇਖਣਾ ਤਾਂ ਤਾਂ ਕਰਨਾ ਪੈਣਾ ਨਾ ਤੇ ਨਹੀਂ ਗ੍ਰਹਿ ਗੁਰਬਚਨ ਉਦਾਸੀ ਮੋਹ ਜਲਾਇਆ ਪਰ ਐਵੇਂ ਹੋਈ ਗੁਰੂ ਦੇ ਉਪਦੇਸ਼ ਨਾਲ ਉਦਾਸੀ ਕਰਤੇ ਕਰਦਾ ਪੁੰਛਦਾ ਤਾ ਖੋਪਰ ਮੋ ਜਲਾਇਆ ਹੋਇਆ ਮੋ ਧੋਇ ਜਾੜ ਤੇ ਠੀਕ ਹੈ ਮੇਰੇ ਨਾ ਹੋਰ ਰਹਿ ਘਰ ਦੇ ਵਿੱਚ ਹੀ ਪਤਾ ਕਿ ਫੇਨਾ ਮੈਨ ਲੱਗਿਆ ਪਰ ਤੁਮ ਇਹ ਨਹੀਂ ਪਤਾ ਲੱਗਿਆ ਕਿ ਫੇ ਕਾ ਤੋੜ ਲਈ ਕਾ ਲਈ ਕਾ ਕਰਕੇ ਕੋਈ ਫਿਰਲਾ ਪਛਾਣਦਾ ਤੁਹਾਰੀ ਆਖੇ ਸੀ ਬੂਰੇ ਦੋ ਬੰਦਿਆਂ ਨੇ ਬੂਰੇ ਬੁਹਾਰੀ ਆਖੀ। ਨਾਂ ਘਰ ਤੇ ਆਉਂ ਪਤਾ ਜਹਾ ਰੋਣ ਦਿੱਤਾ। ਨਾ ਘਰ ਜਿੱਦਲ ਛੱਡ ਕੇ ਗਿਆ। ਉਹੀ ਜਿਹੜੀ ਚੱਕ ਕੇ ਲਿਆਉਂਦਾ ਉਹੀ ਟੋਕਾ ਕਰਦਾ ਸਾਨੂੰ ਧਾਰਾ ਵਿੱਚੋਂ ਉਹੀ ਕੰਮ ਕਰੀ ਜਾਂਦਾ। ਧਿਆਨ ਨੋਬ ਦੇ ਵਿੱਚ ਹੈ। ਰਹਿੰਦਾ ਲੋਕਾਂ ਨੂੰ ਕੀ ਪਤਾ ਲੱਗੇ। ਹਾਂ ਪੁੱਲੀਆਂ ਉੱਪਰੀਆਂ ਗੱਲਾਂ ਲੋਕਾਂ ਨਾਲ ਠਾਠਾ ਬਗਾ ਗੱਲ ਤੋਂ ਉੱਪਰ ਉੱਪਰ ਦੀ ਗੱਲ ਲੋਕਾਂ ਨਾਲ ਵੀ ਹੱਥਾਂ ਹੋ ਰਹੀ ਹੈ ਇਹ ਵੀ ਸੰਤਨ ਸੁਮੇਰੀ ਲੇਵਾਦੇ ਸੰਤਨ ਸੁਬੇ ਪੂਜੀ ਸੋਕੀ ਪਰ ਭਗਤੀ ਭਰੇ ਪੜਹਾਰਾ ਉਹ ਅਵਸਥਾ ਹੈ ਇਹ ਗੁਰਮੁਖੀ ਅਵਸਥਾ ਹੈ ਹੀ ਘਰ ਦੇ ਵਿੱਚੇ ਮੁਖਤ ਹੈ ਠੀਕ ਹੈ ਆਪ ਤਰਿਆ ਕੁਲ ਜਗਤ ਤਰਾਇਆ ਧੰਨ ਜਣੇ ਦੀ ਮਾਇਆ ਆਪ ਤਰਿਆ ਕੁੱਲ ਜਗਤ ਤਰਾਇਆ ਭਰਦੇ ਮੁੰਡੇ ਨਹੀਂ ਕਹੇ ਜਗਤ ਕਹਿਤਾ ਸੀ ਨੇ ਤਰਨਾ ਕਿਹਾ ਹੈ ਕੁੱਲ ਜਗਤ ਜਗਤ ਨੂੰ ਦਾਸ ਗੱਲ ਆਪ ਤਰਿਆ ਕੁੱਲ ਜਗਤ ਤਰਾਇਆ ਜਣੇ ਦੀ ਮਾਇਆ ਐਸੀ ਮਾਂ ਐਸੀ ਬਾਤ ਜਿਹਨੇ ਉਹਨੂੰ ਜੜੀਏ ਇਹ ਨਾ ਰੂਪ ਘੜਿਆ ਰੂਪ ਘੜਿਆ ਨਾ ਰੂਪ ਸਵਾਰਿਆ ਇੱਕ ਰੂਪ ਤੇ ਰੂਪ ਦਿੱਤਾ ਹੈ ਉਹ ਰੂਪ ਐਸੀ ਮਾਂ ਦਾ ਮਤ ਇਹ ਕੰਨ ਹੈ ਬੁੱਧੀ ਦੀ ਗੱਲ ਹੋ ਰਹੀ ਹੈ ਦੁਨਿਆਵੀ ਮਾਂ ਉਹਦੀ ਹਾਂਜੀ ਗੁਰਮਤਿ ਦੀ ਗੱਲ ਹੋ ਰਹੀ ਹੈ ਠੀਕ ਹੈ ਜੀ ਨੇ ਘੜਿਆ ਗੁਰਮਤਿ ਮਾਤਾ ਹੈ ਨਾ ਸਾਡੀ ਮਾਂ ਇਹੀ ਹੈ ਇਹ ਗੁਰਮਤਿਰ ਮੰਗਿਆ ਹੋਇਆ ਹੈ ਉਹ ਜਿਹੜੀ ਪਹਿਲੀ ਬੌਡੀ ਲਈ ਹੈ ਨਾ ਅਰਦਾਸ ਦੀ ਉਹ ਬਾਗਾ ਦੇ ਰੂਪੀ ਤਾਂ ਹੀ ਲਈ ਹੈ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਅਰਦਾਸ ਕਰਨੀ ਮਾ ਦੇ ਮੋਹਰੇ ਅਰਦਾਸ ਪਿਓ ਦੇ ਮੋਹਰੇ ਨਹੀਂ ਪਿਓ ਕੋਲੋਂ ਤੇ ਉਹਨੇ ਭੇਜੀ ਹੈ ਤੇ ਕੱਪ ਕੋ ਉਤੀਸੇ ਮਰ ਕੇ ਗੁਰਨਾਕ ਲਈ ਤੇ ਆਏ ਮਾਤਾ ਅਰਦਾਸ ਤਾਂ ਕਰਦੇ ਆ ਸਰੇ ਅੰਮਦੋ ਵਰਤੇ ਹਰ ਦਾਸ ਰਾਮ ਦਾਸ ਦਾ ਹੋਈ ਸਾਏ ਅਰ ਜਨ ਹਰ ਗੋਬਿੰਦ ਰੋ ਸਿਮਰਾਓ ਸਿਰੀ ਹਰ ਰਾਏ ਸਿਰੀ ਹਰਿ ਕ੍ਰਿਸ਼ਨ ਧਿਆਈ ਧਿਆਈ ਧਿਆਈ ਤੇ ਲੱਗਿਆ ਲਹੁਰ ਬਹਾਦਰ ਸਿਬਰੀ ਐ ਉਹਨੇ ਵੀ ਇਸੇ ਦਾ ਸੁਣਨ ਇਹੀ ਸੰਧੀ ਐ ਕਾ ਨਾ ਇਹ ਇਹ ਬਾਤ ਸਮਾਹਤਾ ਹੈ ਬਾਤਾਂ ਦੇ ਰੂਪ ਵਿੱਚ ਅਰਦਾਸ ਹੈ ਕੀ ਜਾਣਨੇ ਮੇਰਾ ਹੱਥੇ ਦੇ ਦੀਵੇ ਦੀਵੇ ਦੇ ਬਾਦ ਰਖ ਕੇ ਕਾਂਗਰਸਾਂ ਨਾਲ ਇਹ ਮਾਇਆ ਠੀਕ ਹੈ ਜੀ ਇਹ ਆਪ ਆਪ ਤਰਿਆ ਕੁੱਲ ਜਗਤ ਤਰਾਇਆ ਦੀ ਮਾਇਆ ਠੀਕ ਹੈ ਜੀ ਐਸਾ ਸਤਗੁਰ ਸੋਈ ਪਾਏ ਜਿਸ ਧੁਰਮਸਤਕ ਹਰ ਲਿਖ ਪਾਏ ਇਕਦਾ ਲੈ ਗਿਆ ਪਾ ਕੇ ਜੀਤੇ ਸਾਰੇ ਕੇ ਆਇਆ ਹੋਇਆ ਨੇ ਜਿਹੜਾ ਆਇਆ ਸੀ ਲਿਖ ਕੇ ਉਹ ਵੀ ਬਟਾਇਆ ਹੀ ਠੀਕ ਹੈ ਉਹ ਹੀ ਰੱਖਿਆ ਟਾਰਗੇਟ ਜੋ ਲੈ ਕੇ ਆਇਆ ਸੀ ਉਹ ਟਾਰਗੇਟ ਉਹੀ ਰੱਖਿਆ ਉਹ ਪਾਲ ਲੈਣ ਜੇ ਟਾਰਗੇਟ ਬਦਲ ਨਵੇ ਚਾਲੇ ਤੇ ਅਰ ਮਨ ਹਟ ਗਿਆ ਟਾਰਗੇਟ ਬਦਲ ਠੀਕ ਹੈ ਜਨ ਨਾਨਕ ਗੁਰ ਬਲਹਾਰੀ ਆਪਣੇ ਵਿਟੋ ਜਿਨ ਭ੍ਰਮ ਭੂਲਾ ਮਾਰਗ ਪਾਇਆ ਮੈਂ ਆਪਣੇ ਸਤਿਗੁਰ ਤੋਂ ਬਲਿਆ ਕਹਿੰਦਾ ਜਿਹਨੇ ਬਿਰੂ ਕੋਲੇ ਮਾਰਗ ਪਾਇਆ ਉਹ ਭਰਮ ਵੇਖ ਭੁੱਲੇ ਜਿਉ ਦੇਖ ਦੀਪਕ ਪਤੰਗ ਪਚਾਇਆ ਪੰਡਿਤ ਭੁਰਲ ਭੂਲ ਮਾਇਆ ਵੇਖੇ ਵੇਖਾ ਕਿਨੇ ਕਿ ਉਹ ਆਣ ਚੜਾਇਆ ਤੇ ਇਤਨਾ ਮਾਇਆ ਦੇਖ ਕੇ ਫਕੀਰ ਜਿਆਰੀ ਐ ਹਾਂਜੀ ਆਪ ਤੰਦੇ ਪਜਲਿਆ ਦੀਪਕਵੰਨੋ ਆਰੋੜ ਉੱਥੇ ਮਾਇਆ ਛਾੜ ਦਿੰਦੀ ਐ ਆਪ ਤੰਦੇ ਨੇ ਦੀਪਕ ਦੇ ਲਿਆ ਉਧਰੋਂ ਮਾਇਆ ਦੇਖ ਲਈ ਉਧਰੋਂ ਪਜਲਿਆ ਮਾਇਆ ਦੇਖ ਲਈ ਉਧਰੋਂ ਪਜਲਿਆ ਦੋ ਕੀ ਗਏ ਉਹ ਵੀ ਖੱਬ ਸੜਾ ਬੈਠਿਆ ਇਹ ਵੀ ਖੱਬ ਸੜਾ ਬੈਠਿਆ ਤੇ ਗਏ ਵੀ ਉਡਣ ਤੋ ਰਹਿ ਗਿਆ ਪੰਡਤ ਉਹ ਭੁੱਲ ਮਾਇਆ ਵੇਖੈਂ ਵੇਖਾ ਕਿਨੇ ਕਿ ਉਹ ਆਣ ਚੜਾਇਆ ਪੰਡਤ ਵੀ ਮਾਇਆ ਵਾਲੇ ਜਾਗਦੇ ਨੇ ਕਿ ਲਾਵਾ ਕਿਨੇ ਜਿੰਨਾ ਚੜਾਇਆ ਹੈ ਉਹ ਕਿ ਉਹ ਆਣ ਚੜਾਇਆ ਕਿਨੇ ਕੀ ਚੜਾਇਆ ਇਹਦੇ ਚ ਧਿਆਨ ਸਾਡੇ ਵੀ ਇਹ ਜਈ ਧਿਆਨ ਹੈ ਨਾ ਗੁਰਦੁਆਰੇ ਨਾ ਉੱਥੇ ਦਰਬਾਰ ਸਾਹਿਬ ਹੁਣ 500 ਦਾ ਹੁਣ 100 ਦਾ ਟਾਈਮ ਜ਼ਮਾਨਾ ਗਿਆ 500 ਆਹ ਉਹ ਤਾਂ ਫਿਰ ਜ਼ਿਆਦਾ ਲੈਣ ਲੱਗ ਗਏ ਤੇ ਉਹਨਾਂ ਦੇ ਦਾ ਹੀ ਕੱਪੜਾ ਹਾਂ ਪ੍ਰੋਫਿਟ ਢੜ ਗਿਆ ਸੀ ਉਹਨੂੰ ਦਾ ਅੱਛਾ ਜੀ ਪੰਡਤ ਭੁੱਲ ਖੁੱਲ ਮਾਇਆ ਵੇਖੈਂ देखा किने कि के आन चढ़ाया दूजे पाए पड़ा नित बिखिया ना वो बिख्या काते जे है पढ़नी है मैं पढ़नी हूं भाग पढ़ली पढ़नी है हां सोणा पढ़नी है नामली उनका है क्योंकि नामली सब बिखिया ठीक है ਕੀਤੇ ਭਾਈ ਨਮਲਾ ਮਾਇਆ ਦੀ ਧੁੱਪ ਕਰਕੇ ਬਿਖਿਆ ਹੀ ਬੜਦੇ ਨੇ ਉਹ ਸਾਖੀ ਬਿਠਾਉਂਦੇ ਨੇ ਨਾਵੋ ਦਈ ਖਾਉ ਨਾਵ ਤੋਂ ਛਾਰੇ ਹੀ ਨਾਮ ਨਾਲੋ ਸਾਰੇ ਭੁੱਲ ਗਿਆ ਸਾਰਿਆਂ ਤੋਂ ਨਾਮ ਖੋ ਗਿਆ ਪਤਾ ਨਾਮ ਕੀ ਹੁੰਦਾ ਕਿਸੇ ਨੂੰ ਸੇਖਾਂ ਨੂੰ ਬਦਲੋ ਕੀ ਜੋਗੀ ਜੰਗਮ ਸੰਿਆਸੀ ਭੁੱਲੇ ਉਹਨਾ ਅਹੰਕਾਰ ਬਹੁਤ ਗਰਭ ਵਧਾਇਆ ਜੋ ਫਿਰਦੇ ਨੇ ਉਹਨਾ ਅਹੰਕਾਰ ਬਹੁਤ ਵਧਾਇਆ ਉਹਨਾਂ ਦੇ ਨਾ ਲੈਹੀਂ ਸਤ ਭਿਖਿਆ ਮਨ ਹਠ ਜਨਮ ਗਵਾਇਆ ਨਾ ਸਤ ਭਿਖਿਆ ਲੈਂਦੇ ਨੇ ਹਾਂ ਨਾ ਤਾਂ ਸਾਜ ਦਾ ਲਾਭ ਲੈਂਦੇ ਨੇ ਨਾ ਕੀ ਜਿੱਤ ਕਹਿ ਲੈਣੇ ਕੋਨਾਟ ਦਿਨ ਬਿ ਕੋਇਆ ਸਹੀ ਤਰੀਕੇ ਸਦੇ ਕੋ ਲੈ ਲਈ ਤੀਨੇ ਦੇ ਸਤ ਪਖਿਆ ਤਾਂ ਲੈ ਲੋ ਸੱਚ ਦਾ ਗਿਆਨ ਤਾਂ ਲੈ ਲੋ ਲੋਕਤੋਂ ਲਈਓ ਰੋਟੀ ਕਿਵੇਂ ਖਾਣੇ ਜੇ ਛਾਲਨ ਭੋਜਨ ਦੇ ਜਾਂਦੇ ਲੋਕ ਇਹਨੂੰ ਅੱਛਾ ਜੀ ਸੀ ਜਾਂ ਕਹਿਣ ਦਾ ਮਤਲਬ ਹੂੰ ਦੇ ਜਾਂਦੇ ਸੀ ਆਪ ਇਹਨੂੰ ਦੇ ਚਲੇਈ ਲਾਇ ਉਹਨੇ ਉੱਥੇ ਰੋਟ ਪਾ ਲੈਣਾ ਉਹਨਾਂ ਨੇ ਜੇਲੇ ਨੇ ਵੀ ਖਾ ਲ ਲ ਇਹਨਾਂ ਨੇ ਵੀ ਖਾ ਲ ਲ ਠੀਕ ਹੈ ਪਰ ਉਹ ਸੀ ਬੰਦੇ ਕੋਈ ਨਹੀਂ ਨੇ ਜੇ ਕੋ ਗੁਰਮੁਖ ਚਨਾਜਾ ਬੇ ਕਿਹੜਾ ਯਾਰ ਲੱਗੇ ਸੀ ਇਹ ਗੁਰੂ ਗ੍ਰੰਥ ਪੈਂਦਾ ਇਤੜਿਆਂ ਵਿੱਚੋਂ ਸੋ ਜਨ ਸਮੱਧਾ ਜਿਨ ਗੁਰਮੁਖ ਨਾਮ ਤੇ ਆਏ ਕਿੰਨੇ ਆ ਸਾਰਿਆਂ ਵਿੱਚੋਂ ਉਹ ਕੋਈ ਜਨ ਕੋਈ ਵਿਅਕਤੀ ਸੁਭਦ ਹੈ ਜਿਹਨੇ ਗੁਰਮੁਖੀ ਨਾਮ ਤੇ ਆਇਆ ਇਹਨੂੰ ਗੁਰਮੁਖੀ ਦੋਪਤ ਹੈ ਸੁਭਦ ਕਿਹਨਾਂ ਸੁਭਦ ਅੰਦਰ ਟਿਕਾਉ ਹੈ ਜਦੋਂ ਤੋਂ ਸੁਭਦਾ ਬਣਿਆ ਤਨਮ ਦਾ ਮਤਲਬ ਹੈ ਜਿਹੜਾ ਅੱਧਾ ਸੀ ਨਾ ਉਹ ਦੋਏ ਅੱਧੇ ਦੇ ਨਾਲ ਤਾਂ ਹੀ ਹੋ ਗਿਆ ਹੋ ਗਿਆ ਇਕੋ ਜੀ ਨਾ ਤੇ ਉਹਦੇ ਤੋਂ ਇਹ ਕੋਈ ਜੀ ਹੋ ਹੋ ਅਸਰ ਜਿੱਤਰ ਮੂਦ ਕਰਕੇ ਅੰਦਰ ਜੀ ਉਹਨਾਂ ਦੇ ਸਬੂਤਾ ਹੋ ਗਏ ਜਨ ਨਾਨਕ ਆਖ ਸੁਣਾਈਏ ਜਾਂ ਕਰਤੇ ਸਭ ਕਰਾਇਆ ਹਨ ਕਰਤੇ ਸਭ ਕਰਾਇਆ ਜਾਂ ਕਰਤੇ ਤੋਂ ਅਸੀਂ ਉਪਦੇਸ਼ ਕਿਹਨੂੰ ਦਈਏ ਕੋਈ ਤਾਂ ਇਹ ਜਿਹੇ पर फिरो कहंदे क्यों भी ऐ नहीं करदे एदा की भाव है कहण दा जे ओ करता इ इकरार है लोग दोष दे रहे हैं किसे नु नहीं लोकां नु जेना भरमा ओना दूर करना ही है होवान बरसो समझ में आने ओना दा माया मोह प्रेत है काम क्रोध अहंकार खुद से प्रेम हां माया मोह ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰ ਜਿਹਨੂੰ ਭਾਇਆ ਦਾ ਬੋਹ ਹੈ ਨਾ ਪ੍ਰੇਤ ਜੋ ਕੋਈ ਪ੍ਰੇਤ ਜੋਨ ਉਤਰ ਪ੍ਰੇਤ ਹੈ ਉਹ ਮੈ ਹੈ ਉਹ ਜੋਨ ਬਲ ਉਤਰ ਪ੍ਰੇਤ ਕਮਲ ਗੂਗੋ ਤੇ ਤਾਂ ਪ੍ਰੇਤ ਦੀ ਡੈਫੀਨੇਸ਼ਨ ਆ ਕਿ ਭਾਇਆ ਦਾ ਬੋਹ ਜਿਹਨੂੰ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰ ਕਾਮ ਕ੍ਰੋਧ ਅਹੰਕਾਰ ਹੈ ਉਹਦੇ ਇਹ ਜਮ ਕੀ ਸਰਕਾਰ ਹੈ ਇਨਾ ਉੱਪਰ ਜਮਕਾ ਡੰਡ ਕਰਾਰਾ ਜਬ ਤੇ ਹਕੂਬ ਤੇ ਗਾਵੇਦਾਰੇ ਸਿਰ ਉੱਪਰ ਕਾਰ ਜਾਂਦੀ ਹੈ ਕਾਰ ਜਾਂਦੀ ਕਿਵੇਂ ਜਿਹੜੀ ਆਪਣੀ ਮਰਜ਼ੀ ਹੈ ਨਾ ਸਾਡੀ ਆਪਣੀ ਮਰਜ਼ੀ ਉਹ ਸਾਡੀ ਆਪਣੀ ਮੌਤ ਹੈ ਉਹ ਪਰਮ ਕਰਕੇ ਪਰਮ ਜਵ ਜਿਹੜੀ ਕਾਰ ਹੈ ਕਾਰ ਇਹਨਾਂ ਪਰਮ ਚੋ ਉਹੀ ਸਾਡੀ ਉਹਦੇ ਮੌਤ ਸੁਪੀ ਹੋਈ ਹੈ ਸਾਡੀ ਜੋ ਕਾਰ ਅਸੀਂ ਪਰਮ ਵਿੱਚ ਕਰ ਰਹੇ ਹਾਂ ਸੋ ਜਿਹੜਾ ਹੈ ਜੋ ਸਾਡੀ ਸੋਚ ਹੈ ਨਾ ਪਰਮ ਦੀ ਇਹਦੇ ਵਿੱਚੇ ਸਾਡੀ ਮੌਤ ਛੁਪੀ ਹੋਈ ਹੈ ਅਸਲ ਤੇ ਮੌਤ ਹੈ ਸਾਡੇ ਦਿਲ ਦੀ ਕਾਰ ਹੈ ਜੋ ਕਰ ਰਹੇ ਹੁੰਦੀ ਸੋਚ ਕੇ ਆਪਣੀ ਵਰਤੀ ਨੂੰ ਜੀਵਨ ਦਾ ਜੀਉ ਰਹੇ ਹਾਂ ਨਾ ਇਹ ਜਮਕੀ ਕਾਰ ਹੈ ਗੁਰਬਾਣੀ ਇਹ ਕਹਿੰਦੀ ਹੈ ਦੁਨੀਆਂ ਜੋ ਬੰਸੀ ਬੁੱਧੇ ਲੋ ਬੁੱਧੇ ਠੀਕ ਹੈ ਜੀ ਇਹਨਾਂ ਉੱਪਰ ਜਮਕਾ ਡੰਡ ਕਰਾ ਰਾ ਡੰਡ ਵੀ ਕਰਾ ਕਿ ਕਹਿੰਦਾ ਵੀ ਬੂਰਾ ਦੀ ਸਹੇਜ ਜੋਲ ਨਾਲੇ ਮਨ ਨੂੰ ਪੇਤਾਉ ਮਨ ਮੁਖ ਜੰਮ ਮਗ ਪਾਇਨ ਜਿਨ੍ਹਾਂ ਦੂਜਾ ਭਾਉ ਪਿਆਰ ਜੇ ਨੂੰ ਗਰੇ ਹੈ ਜੀ ਮਗ ਨੂੰ ਨੇ ਕਿਵੇਂ ਬਣਾਉਤ ਤੇ ਕਲਪ ਲੱਗੇ ਹੋਏ ਉਹਦੀ ਪਾਇਾਂ ਨੂੰ ਵਾਰਗ ਪਾਇ ਉਕੇ ਬਾਗ ਗੋਰੇ ਲੋਕ ਹੈ ਗੋ ਗੱਗੇਰੂ ਉੱਪਰ ਤੁੜ ਗੋੜੇ ਅੱਛਾ ਜੀ ਜੀ ਤਾਂ ਬਾਤ ਆਪ ਵੀ ਤਾਂ ਮਗ ਇੱਥੇ ਜ਼ਿਆਰੀ ਕਹਿੰਦੇ ਉੱਥੇ ਉੱਪਰ ਢੱਕੇ ਹੋਏ ਸਹਿਬ ਪਤਾ ਵੈ ਕੀ ਹੋਣਾ ਚਾਹੀਦਾ ਪੱਛੇ ਦੂਜਾ ਭਾਅ ਹਾਂਜੀ ਦੱਗੀ ਐ ਦੱਗੇ ਨੂੰ ਜਹਰੀ ਐ ਠੀਕ ਐ ਜੀ ਜੱਬ ਦੇ ਮਾਰਗ ਪਾਇਏ ਹੋਏ ਨੇ ਠੀਕ ਐ ਜੀ ਜਿਹਨੂੰ ਦੂਜਾ ਭਉ ਪਿਆਰ ਆ ਜਿਹਨਾਂ ਨੂੰ ਦੂਜਾ ਸ਼ਰੀਰ ਦਾ ਪਿਆਰ ਦੂਜਾ ਭਉ ਆ ਉਹਨਾਂ ਨਾਲ ਸ਼ਰੀਰ ਜੀ ਭੁੱਖ ਪਾਲ ਲੈ ਦੀ ਲੋੜਾਂ ਦਾ ਜਿਹਨਾਂ ਦਾ ਪਿਆਰ ਆ ਉਹ ਜੱਬ ਮਾਰਗ ਪਏ ਹੋਏ ਨੇ ਉਹ ਆਪਣੀ ਮਰਜ਼ੀ ਦੇ ਚੱਲਦੇ ਨੇ ਆਪਣੀ ਇੱਛਾ ਅਨਸਾਰ ਚੱਲਦੇ ਨੇ ਆਪਣੀ ਜਸ ਉਜਾਰ ਜੀ ਜੀਵਨ ਜੀਉੜੇ ਚਾਹ ਉਹਨੇ ਜਿਹੜੇ ਲੋਕੋ ਚੱਬਦੇ ਮਾਰਗ ਪਏ ਹੋਏ ਨੇ ਲੋਜੀ ਜੰਪੂਰ ਬੱਦੇ ਮਾਰੀਆਂ ਨੂੰ ਸੁਣੇ ਨਾ ਪੁਕਾਰਾ ਜੰਪੂਰ ਤੇ ਇੰਨੀ ਮਾਰ ਪੈਂਦੀ ਐ ਕਹਾਂ ਦੀ ਸੁਣ ਵਾਲਾ ਵੀ ਉੱਤੇ ਕੋਈ ਨਹੀਂ ਹੁੰਦਾ ਪੁਕਾਰ ਉੱਤੇ ਨਹੀਂ ਕੋਈ ਸੁਣਦਾ ਉੱਤੇ ਕੋਈ ਕਹਿਣਾ ਮੈਨੂੰ ਵੀ ਹੋਰੀ ਦੁਆ ਨਾਗੋੜ ਕੋਈ ਪੁਕਾਰ ਦੀ ਸੁਰਤ ਨਹੀਂ ਕੋਈ ਪੁਕਾਰ ਨਹੀਂ ਸੁਣਦਾ ਉਕੇ ਜਿਦਾਂ ਇੱਕ ਫਰੀਦ ਸਾਹਿਬ ਦੀ ਜਿਹੜੇ ਕਹਾਣੀ ਕਹਾਣੀ ਜਿਵੇਂ ਤੇਲ ਪੀੜੇ ਤੇ ਆਏ ਪੀੜੇ ਜਾਂਦੇ ਨੇ ਜੀ ਜਿਸ ਕਿਰਪਾ ਕਰੇ ਤਿਸ ਗੁਰ ਮਿਲੈ ਗੁਰਮੁਖ ਨਿਸਤਾਰ। ਜਿੱਤੇ ਕਿਰਪਾ ਹੋ ਜਾ ਦੀ ਉਹ ਗਿਆਨ ਮਿਲ ਜਾਂਦਾ। ਐਟੇ ਗੁਰ ਦਾ ਗਿਆਨ। ਇਹ ਕੋਈ ਜਨ ਦੇਲ ਵਾਲਾ ਦੇ ਜਾਂਦਾ। ਜਿੱਤੇ ਗੁਰ ਉਪਰਣ ਕੋ ਕੇ ਰਾਲੇ ਉੱਪਰ ਇਸ ਕਰਕੇ ਗਿਆ ਤੀਰਵਾਲਾ ਗੁਰ ਹੈ। ਕੋਈ ਸਮਝ ਹੋਂ ਵਾਲਾ ਨਹੀਂ ਜੰਤ ਸਾਹਿਬ। ਗੁਰ। ਹਾਂਜੀ ਗੁਰਮੁਖੀ ਨਿਸਤਾਰ। ਗੁਰਮੁਖੀ ਜੇ ਉਹ ਬਣ ਜਵੇ, ਜੇ ਉਹ ਗੱਲ ਬੋਲ ਲਵੇ। ਉਹਦੀ ਸਤਗੋਲ ਗੁਰਮੁਖੀ ਬਣ ਕੇ ਸਾਰਾ ਹੋ ਜਾਂਦਾ। ਉਹਦਾ ਹੋ ਜਾਂਦਾ। ਠੀਕ ਹੈ।